ਜੇ ਲੋਕ ਮਹੱਲਾ ਪੰਜਵਾਂ ਪਾਰ ਬ੍ਰਹਮ ਫਰਮਾਇਆ सहज ਵੁੱਠਾ ਸਹਿਜ ਸੁਭਾਏ ਅੰਨ ਧੰਨ ਬਹੁਤ ਉਪਜਿਆ ਪ੍ਰਿਥਵੀ ਰੱਜੀ ਤ੍ਰਿਪ ਤਗਾਏ ਅਭੀ ਇਹ ਬਹਾਲੇ ਵੀ ਦੀ ਗੱਲ बोले ਹੈ ਜਾਂ ਪਾਰ ਬ੍ਰਹਮ ਬੋਲਿਆ ਤਾਂ ਬਹੁਤ ਬੋਲੇ ਉਹਦੇ ਬੁਲਾਏ ਹੋਏ ਜੋ ਪਾਰ ਕਿਸੇ ਗੁੱਸੇ ਨਾਲ ਨਹੀਂ ਬੋਲ ਰਿਹਾ ਕਿਸੇ ਨਾਲ ਨਰਾਜ਼ਗੀ ਨਾਲ ਨਹੀਂ ਬੋਲ ਰਿਹਾ ਉਹ ਤਾਂ ਗਿਆਨ ਦੇਣ ਵਾਸਤੇ ਬੋਲ ਰਿਹਾ ਜੰਗਲ ਦੇ ਵਿੱਚ ਖੋਏ ਫਿਰਦੇ ਇਹਨਾਂ ਨੂੰ ਦੱਸਿਆ ਰਾਹ ਏ ਹੋਰ ਕੁਝ ਨਹੀਂ ਇਹ ਜਿਹੜੇ ਉੱਧੀਆਂ ਫੁੜੀਆਂ ਫਿਰਦੇ ਨੇ ਜੰਗਲ ਵਿੱਚ ਇਹਨਾਂ ਨੂੰ ਰਾਹ ਦੱਸਣ ਵਾਸਤੇ ਬੋਲਿਆ ਸੈਸ ਇਹ ਗੁੱਸਾ ਕਰਦੇ ਨੇ ਠੀਕ ਹੈ ਅੰਨ ਧੰਨ ਬਹੁਤ ਉਪਜਿਆ ਪ੍ਰਿਥਵੀ ਰੱਜੀ ਤ੍ਰਿਪਤਗਾਈ ਸਾਰਿਆਂ ਨੂੰ ਪੁੱਛਣਾ ਕੁਝ ਗਿਆਨ ਮਿਲਿਆ ਹਰ ਪੇੜ ਪੌਦੇ ਨੂੰ ਫੁੱਲ ਫੁੱਲ ਲੱਗਿਆ ਇਹਨੂੰ ਜਿੰਨਾ ਵੀ ਥੋੜੇ ਤੋਂ ਥੋੜੇ ਗਿਆਨ ਵਾਲੇ ਨੂੰ ਵੀ ਮਿਲਿਆ ਸਾਰਿਆਂ ਨੂੰ ਲਾਭ ਹੋਇਆ ਦੁਨੀਆਂ ਦੇ ਜਿੰਦੇ ਜੀਵ ਤੇ ਇਹ ਨਹੀਂ ਐ ਵੀ ਜਿਹੜੇ ਉੱਚ ਕੋਟੀ ਦੇ ਪਾਰ ਹੋ ਗਏ ਉਹ ਦੂਜੇ ਥੋੜਾ ਹੋ ਗਿਆ ਉਹਨਾਂ ਨੂੰ ਉਹਨੇ ਦੇ ਨਾਲੇ ਜਿਹੜੀਆਂ ਬਤਾਂ ਨਾਲ ਉਹਨਾਂ ਨੂੰ ਪਰਪਤੀ ਹੋਣਾ ਦਾ ਦੂਰ ਹੋ ਗਿਆ ਹਾਂਜੀ ਸਦਾ ਸਦਾ ਗੁਣ ਉਤਪਰ ਦੁਖਦਾਲਦ ਗਿਆ ਬਿਲਾਏ ਸਦਾ ਸਦਾ ਗੁਣ ਉਤਪਰ ਸਾਦੇ ਗੁਣ ਕਵਾਂ ਲਾਗੇ ਪਰਮੇਸ਼ਰ ਦੇ ਪਰਮੇਸ਼ਰ ਦੇ ਗੁਣ ਦਾ ਗੱਲ ਸਭ ਸਾਰੇ ਹੀ ਦੂਰ ਹੋ ਗਏ ਜਿਦਾ ਦੇ ਦਿੰਦੇ ਨੇ ਇਹ ਤਾਂ ਭਲੇਖੇ ਦੂਰ ਹੋ ਗਏ ਉਹ ਇਹ ਕਰਦੇ ਤੇ ਇਹ ਚੱਲਦੇ ਤੇ ਉਹ ਤਾਂ ਬੰਦ ਹੋਏ ਠੀਕ ਹੈ ਹਾਂਜੀ ਦੁਖਦਾਲਦ ਗਿਆ ਬਿਲਾਏ ਦੁਖਦਾਲਦ ਬਿਲਾਏ ਜਿਹੜੇ ਸਾਰੇ ਦੂਰ ਹੋ ਗਏ ਅੱਜ ਅੱਜ ਦਾ ਕੱਲ ਨੂੰ ਗੱਲ ਨੂੰ ਇਹ ਜੁਟ ਕੇ ਸਾਡੇ ਆਪਣਾ ਪੂਰਬ ਲਿਖਿਆ ਪਾਇਆ ਮਿਲਿਆ ਤਿਸੇ ਰਜ਼ਾਈ ਜਿਹੜਾ ਮੰਨੇ ਪੂਰਬ ਵਿੱਚ ਪਹਿਲਾਂ ਥੋੜਾ ਜਿਹੜਾ ਹੋ ਗਿਆ ਇਹਦਾ ਪਹਿਲਾ ਲਬਦਾ ਸੀ ਨਾ ਜਿਵੇਂ ਕਬੀਰ ਲਬਦਾ ਸੀ ਗੁਰੰਦਾ ਸੀ ਉਹਨਾਂ ਦਾ ਮੇਲ ਹੋ ਗਿਆ ਜਿੱਦਾਂ ਪੂਰੀ ਪਿਲੇ ਨੇ ਪਾ ਲਿਆ ਪਰਮੇਸ਼ਰ ਜੀ ਵਾਲਿਆ ਨਾਨਕ ਤੇ ਨੇ ਉਹ ਜੁਨਾ ਗੱਲ ਲਿਆ ਇਹ ਫਿਰ ਹੁਣ ਜਨਮ ਪਦਾਰਤਾ ਜਨਮ ਪਦਾਲ ਦੇ ਤਾਂ ਪਹਿਲਾਂ ਹੀ ਸੀ ਅਸਲ ਚ ਉਹ ਮਰੇ ਤਾਂ ਪਹਿਲਾਂ ਹੀ ਸੀ ਦੁਨੀਆ ਦਾ ਪਹਿਲਾਂ ਹੀ ਛੱਡੀ ਸੀ ਉਹਨਾਂ ਦੀ ਜਨ ਪਦਾਰਥੇ ਚਾਹੁੰਦੇ ਸੀ ਗੁਲ ਗਿਆ ਠੀਕ ਹੈ ਜੀ ਪਰਮੇਸ਼ਰ ਜੀ ਵਾਲਿਆ ਨਾਨਕ ਤਿਸੈ ਧਿਆਏ ਧਿਆਨ ਉਹਦਾ ਜੇ ਜੁੜ ਗਿਆ ਉਹਦੇ ਵਿੱਚ ਇੱਕ ਮੈਂ ਕਹੋਗੇ ਠੀਕ ਹੈ ਜੀ ਨਾ ਪੰਜਵਾਂ ਜੀਵਨ ਪਦ ਨਿਰਬਾਣ ਇੱਕੋ ਸਿਮਰੀਐ ਦੂਜੀ ਨਾਹੀਂ ਜਾਏ ਕਿਨ ਬਿਦ ਧੀਰੀਐ ਆ ਜਿਹੜਾ ਜੀਵਨ ਲਿਆ ਇਹਨੂੰ ਜੀਵਨ ਪਦ ਕਹਿੰਦੇ ਨੇ ਉਹਨਾਂ ਨੂੰ ਜੀਵਨ ਪਦ ਵੀ ਮਿਲਿਆ ਜੀਵਨ ਪਦ ਦਰਵਾਣਾ ਦਰਵਾਣਾ ਦਰਵਾਣਾ ਕਹਿੰਦੇ ਕਹਿੰਦੇ ਨੇ ਇਹ ਬੋਲ ਕੇ ਨਹੀਂ ਦੱਸਿਆ ਜਾ ਸਕਦਾ ਜੀਵਨ ਪਦ ਇੱਥੇ ਬੋਲਦੇ ਨਹੀਂ ਆਲੀ ਆਵਾਜ਼ ਵੀ ਇੱਥੇ ਹੁੰਦੀ ਠੀਕ ਹੈ ਜੀ ਉਹ ਦਰਵਾਣਾ ਹੁੰਦਾ ਹੈ ਉਹ ਬੋਲਣ ਤੋਂ ਪਰੇ ਦਾ ਪਦ ਹੈ ਦੱਸਿਆ ਨਹੀਂ ਜਾ ਸਕਦਾ ਉਹ ਮੂਹਗਾ ਦੀ ਸਿਆਹੀ ਜਾਂ ਜਿਹਨੇ ਖਾਲੀ ਬਸ ਉਸ ਨੂੰ ਪਤਾ ਹੈ ਕਿਉਂ ਮੂਹਗਾ ਗੁਰਖਾਇਆ ਉਹ ਨਿਰਵਾਣ ਦਾ ਗੁੰਭੈ ਨਹੀਂ ਬੜਿਆ ਇਹ ਜਿਹੜਾ ਜਿਉਂਦਾ ਹੋਇਆ ਨਾ ਉਸੇ ਨੂੰ ਪਤਾ ਜਿਉਂਦਾ ਹੋਇਆ ਦੂਜਾ ਨਹੀਂ ਬਣ ਸਕਦਾ ਉਹ ਕੋਈ ਸਮਾਂ ਰਹਿ ਗਿਆ ਦੂਆ ਹੈ ਹੀ ਨਹੀਂ ਕਿਤੇ ਵਿਚ ਉਹਨਾਂ ਦੇ ਕਿਹਾ ਪਾਉ ਮਾਇਆ ਦਾ ਪੌਛ ਜਿਤ ਵਿੱਚੇ ਵੀ ਦੂਜੀ ਨਹੀਂ ਜਾ ਰਹੀ ਦੂਜੀ ਦਾ ਜਗ੍ਹਾ ਹੀ ਨਹੀਂ ਕੋਈ ਉਹਨਾਂ ਦੇ ਜਿਤ ਵਿੱਚ ਦੂਜੇ ਵਾਸਤੇ ਤਾਂ ਕੋਈ ਜਗ੍ਹਾ ਹੀ ਨਹੀਂ ਮਾਇਆ ਵਾਸਤੇ ਤਾਂ ਕੋਈ ਜਗ੍ਹਾ ਹੀ ਨਹੀਂ ਉਹਨਾਂ ਦੇ ਜਿਤ ਵਿੱਚ ਉਹ ਵਾਸਤੇ ਤਾਂ ਜਗ੍ਹਾ ਹੀ ਨਹੀਂ ਬਕਾਰਾ ਵਾਸਤੇ ਤਾਂ ਜਗ੍ਹਾ ਹੀ ਨਹੀਂ ਦੇ ਅੰਦਰ ਤਾਂ ਹੀ ਉਜੀ ਜਾਏ ਕਿੰਨ ਬਿਧ ਅਸੀਂ ਇਸ ਦੇ ਨਾਲ ਕਰੀਏ ਉਹ ਨਾ ਕੋਈ ਜਗਾ ਹੈ ਨਹੀਂ ਸਾਨੂੰ ਪਤਾ ਹਨ ਯਕੀਨ ਕਰ ਕੀ ਗੱਲ ਹੈ ਉਹਦਾ ਨਿਰਵਾਣ ਹੈ ਜਸੰਤੇ ਭਰੇ ਹੈ ਠੀਕ ਹੈ ਹੁਣ ਤਾਂ ਕਹਤਾ ਦੂਜੀ ਕੋਈ ਹੈਗੀ ਜਵਾਹ ਦੂਜੀ ਕੋਈ ਚੀਜ਼ ਹੈ ਦੀਸਾ ਆ ਆਵੇ ਹੁੰਦੀ ਹੈ ਕੋਈ ਵਾਕਿਆ ਹੀ ਹਮੇਂ ਕੀ ਹੁੰਦਾ ਇਸ ਗੱਲ ਦਾ ਤੀ ਕਿ ਤਨ ਤਨ ਹੋਸੀ ਛਾਰ ਜਾਣੇ ਕੋਈ ਜਨ ਇੰਨੀ ਗੱਲ ਜਾਣ ਸਕਦਾ ਕੋਈ ਜਾਣੇ ਕਿ ਕਾ ਸਭ ਸੰਸਾਰ ਸੁਖ ਨਹੀਂ ਨਾ ਨੋਦ ਮਿਲ ਕੇ ਆਪਦੇ ਬਿਨਾ ਸੁਖ ਨਹੀਂ ਹੈਗਾ ਜਹਰ ਦੇ ਵਿੱਚ ਸਾਰਾ ਫਿਰ ਕੇ ਦੇਖ ਲਿਆ ਇਹ ਤਾਂ ਸਾਰੇ ਜਾਣਦੇ ਹੁੰਦੇ ਕਹਿੰਦੇ ਤੁਸੀਂ ਕਹਿੰਦੇ ਗੱਲ ਤਾਂ ਜਾਣਦੇ ਤਨ ਮਨ ਹੋਸੀ ਜਾਣੇ ਕੋਈ ਜਨ ਆ ਜਿਹੜਾ ਤਨ ਸ਼ਰੀਰ ਹੈ ਤੇ ਛਾਰ ਹੋਏ ਜਾਂਦਾ ਇਹ ਵੀ ਆਪਾਂ ਜਾਣਦੇ ਕੋਈ ਵੀ ਜਨ ਜਾਣਦਾ ਹੈ ਕੋਈ ਵੀ ਸਾਰੇ ਜਾਣਦੇ ਕੋਈ ਕੋਈ ਜਾਣਦਾ ਕੋਈ ਵੀ ਜਾਣਦਾ ਹੈ ਸਾਰੇ ਜਾਣਦੇ ਵੀ ਕੀ ਕੋਈ ਹੋਏ ਜਾਂਦੇ ਇਸ ਗੱਲ ਨੂੰ ਹੈ ਆ ਤੇ ਵਿਰਲਾ ਲੱਭਣਾ ਜਾਣੇ ਕੋਈ ਵਿਰਲਾ ਹਾਂ ਹਾਂ ਉੱਥੇ ਵਿਰਲਾ ਹੋ ਜਾਣੇ ਵਿਰਲਾ ਨਾਲ ਵਰਤਿਆ ਰੰਗ ਰੂਪ ਰਸ ਬਾਦ ਕਿ ਕਰੇ ਪ੍ਰਾਣੀਆਂ ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣੀਆਂ ਰੰਗ ਰੂਪ ਰਾਸ ਬਾਦ ਇਹਦੇ ਰੰਗ ਰੂਪ ਰਾਸ ਦੇ ਤੇ ਬਾਦ ਬਾਦ ਦਾ ਵਿਚਾਰ ਬਾਦ ਦਾ ਵਿਚ ਕਰੇ ਪ੍ਰਾਣੀਆਂ ਇਹਦੇ ਵਿੱਚੇ ਪ੍ਰਾਣੀ ਫਸੇ ਨੇ ਰੰਗ ਰੂਪ ਰਾਸ ਦੇ ਵਿੱਚ ਬਾਦ ਬਾਦ ਵਿੱਚ ਫਸੇ ਜਲਾਦਾਰੀ ਨੂੰ ਪਤਾ ਲੱਗ ਰਿਹਾ ਉਹਨੂੰ ਇਹ ਨਹੀਂ ਕਹਾਰਾ ਰਿਹਾ ਜਿਹੜਾ ਕਾਲਾ ਨਾ ਕਾਲਾਏ ਕਾਲਾ ਕਾਲੀ ਕਲਾ ਹੈ ਉਹਦੀ ਇਹ ਕਲ ਹੀ ਕਾਲ ਹੈ ਤੇਰਾ ਇਹ ਹੀ ਦਿੱਤੀ ਆ ਠੀਕ ਹੈ ਤੈਨੂੰ ਜਿਹੜੀ ਕਲਾ ਦਿੱਤੀ ਆ ਨਾ ਤੇ ਦੁਸ਼ਮਣ ਸ਼ਕਤੀ ਦਿੱਤੀ ਅਸਲ ਚ ਉਹਦੇ ਵਿੱਚ ਤੇਰੀ ਮੌਤ ਹੈ ਤੈਨੂੰ ਤੇਰੀ ਮੌਤ ਦਿੱਤੀ ਹੈ ਤੈਨੂੰ ਤੇਰਾ ਜੀਵਨ ਨਹੀਂ ਦਿੱਤਾ ਤੇਰਾ ਜੀਵਨ ਉਹਨੇ ਆਪਣੇ ਹੱਥ ਰੱਖਿਆ ਤੇਰੀ ਬਹੁਤ ਤਰੂ ਦੇਤੀ ਮੋਤ ਦਾ ਤੈਨੂੰ ਦੇਤੀ ਤੇ ਜੀਵਨ ਰੱਖਿਆ ਉਹਦੀ ਡੋਰੀ ਆਪਣੇ ਹੱਥੇ ਚ ਜਿਹੜੀ ਕਲਪਨਾ ਹੈਹੀ ਤੇਰਾ ਕਾਲ ਹੈ ਕਲਪਨਾ ਜਦੋਂ ਤੱਕ ਛੱਡ ਕਾਲ ਛੁੱਟ ਗਿਆ ਤੇ ਡੋਰੀ ਜੀਵਨ ਦੀ ਤਾਂ ਉਹਦੇ ਰਹਿਣੀ ਹੈ ਡੋਰੀ ਨੂੰ ਕੋਹੜਾ ਤੂੰ ਮਾਰਦਾ ਤੂੰ ਮਾਰ ਗਈ ਡੋਰੀ ਕੱਟ ਕਾਲ ਕਲਪਨਾ ਤਵੇਨ ਖਾਏ ਆਜ ਪਰ ਖਮੇ ਰਹੇ ਸਮਾਏ ਫੈਰ ਕੋਹੜਾ ਦਾ ਤੂੰ ਮਾਰਦਾ ਨਾ ਆਪਣੇ ਹੱਥ ਆਪਣੇ ਅੱਖੀਂ ਆਪਣਾ ਆਪੇ ਜੀ ਦੀ ਸਵਾਰਦਾ ਜੇ ਤੂੰ ਆਪਣੇ ਆਲੀ ਡੋਰੀ ਹੈ ਜਿਹੜੀ ਤੇਰੇ ਕਾਲ ਵਾਲੀ ਇਹ ਵੀ ਸਿਰਲੇ ਨੂੰ ਦੇ ਵੱਲ ਵੀ ਦੋਏ ਸਿਰੇ ਤੂੰ ਫੜ ਜੀਵਨ ਦੀ ਇੱਛਾ ਆਪਣੇ ਕੋਲ ਰੱਖਦਾ ਜੀਵਨ ਦੀ ਇੱਛਾ ਤਿਆਗਦੇ ਜਿੱਦਾਂ ਜੀਵਨ ਦੀ ਇੱਛਾ ਜਨਾਂ ਜਨੀ ਤਿਆਗਦਾ ਮਾਨਕਬੂਲ ਨਹੀਂ ਕਰਦਾ ਜੰਮਣ ਵੱਲ ਨਹੀਂ ਘਟਿਆ ਜਾਂਦਾ ਉਹ ਡੋਰੀ ਆਪਣੇ ਕੋਲ ਅੱਖੀ ਬੈਠੇ ਸਵਾਰ ਹੀ ਨਹੀਂ ਕਰਦਾ ਉਹ ਹਾਂਜੀ ਇਹ ਡੋਲੀ ਜਿਹੜੀ ਆਪਣੇ ਪਾਸੇ ਆਲੀ ਫੜੀ ਏ ਸਿਰਦੇ ਉਹਨੇ ਫੈਰਾਂਗੇ ਵੀ ਇਹ ਵੀ ਤੂੰ ਹੀ ਚੱਕ ਦੋਇਆ ਤੂੰ ਹੀ ਰੱਖ ਜਾਂ ਮੰਨਣਾ ਫੜਿਆ ਆਇਆ ਏ ਸਿਰ ਕਰਤਾ ਜਦ ਤਾਂ ਸੱਲ ਨੇ ਬੱਲਣੀ ਏ ਮੇਰੇ ਵੱਲ ਵਰਤੀ ਤਾਂ ਇਹਨੂੰ ਤੂੰ ਲੈ ਲੈ ਤੂੰ ਮੇਰੇ ਵੱਲ ਆ ਜਾ ਠੀਕ ਹੈ ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣਿਆ ਉਹ ਨਹੀਂ ਜਾਣੀ ਉਹਨੂੰ ਅਗਲ ਵਕਤ ਕਿੱਥੇ ਪਤਾ ਲੱਗਿਆ ਜਿਦੋਂ ਭਲਾ ਅਦਤਾਪ ਉਹਨੇ ਭੇਜੇ ਨਹੀਂ ਜਾਣਿਆ ਰੰਗ ਰੱਤੇ ਨਿਰਵਾਣ ਸੱਚਾ ਗਾਵਹੀ ਨਾਨਕ ਸ਼ਰਨ ਦੁਆਰ ਜੇ ਤੁਧ ਭਾਵਈ ਰੰਗ ਰੱਤੇ ਨਿਰਵਾਣ ਨਿਰਵਾਣ ਦੇ ਰੰਗ ਵਿੱਚ ਤੂੰ ਇਹਨਾਂ ਚੱਲ ਗਿਆ ਰੰਗ ਰੱਵਣ ਦਾ ਓ ਫਿਰ ਜੀ ਰਹੋ ਨੇ ਉਹ ਸੱਚੇ ਨੂੰ ਹੋ ਨੇ ਮਾਇਆ ਦੇ ਗਾਂ ਕੀ ਤਿੰਨ ਗਾਂ ਸੱਚ ਦੇ ਸੱਚ ਦਾ ਗੁਣ ਗਾਇਨ ਕਰਦੇ ਨੇ ਠੀਕ ਹੈ ਜੀ ਨਾਨਕ ਜੇ ਤੁਧ ਭਾਵੇ ਨਾਨਕ ਵੀ ਤੇਰੇ ਚਲ ਆਇਆ ਤੇਰੇ ਦਵਾਰੇ ਦੀ ਚਲ ਆਇਆ ਜੇ ਬੇਦੂ ਭਖਲ ਵੀ ਜੇ ਤੈਨੂੰ ਜਿੱਦਾਂ ਲੱਗ ਜੂ ਤਾ ਨਿਰਭਾਜੂ ਠੀਕ ਹੈ ਜੀ ਪੌੜੀ जमन ਮਰਨ ਨਾ ਤਿੰਨ जो हर लड लागे, जीवत से ਸੇ ਪ੍ਰਵਾਣ ਹੋਏ ਹਰ ਕੀਰਤਨ ਜਾਗੇ ਉਹਨਾਂ ਨੂੰ ਜੰਮਣ ਮਰਨ ਹੁੰਦਾ ਹੀ ਨਹੀਂ ਜੋ ਹਰ ਲੜ ਲਾਗੇ ਜਿਹੜੇ ਹਰ ਦੇ ਲੜ ਲਾਗੇ ਜਿਨ੍ਹਾਂ ਨੇ ਉਹ ਰੱਸੀ ਬਣਾਤੀ ਨਾ ਆਪਣੀ ਮੌਤ ਵਾਲੀ ਹੰਦੀ ਕੋਲ ਸੀ ਉਹ ਦੂਏ ਨੂੰ ਬੜਾਤੀ ਅਦੇ ਲਾ ਲਾ ਕੇ ਜਿਹੜੇ ਉਹ ਜਮਨਵੰਤ ਤੋਂ ਪਰੇ ਚਲੇ ਗਏ ਠੀਕ ਹੈ ਪਰਵਾਣ ਹੋਏ ਉਹ ਜਿਉਂਦੇ ਹੀ ਪਰਵਾਣ ਹੋ ਗਏ ਹਰ ਕੀਰਤਨ ਜਾਗੇ ਹਰ ਕੀਰਤਨ ਵਿੱਚ ਜਾਗੇ ਹੋ ਰਿਹਾ ਸੀ ਸੱਚਖੰਡ ਜਿੱਤੇ ਜਾ ਕੇ ਜਾਗੇ ਉਤੇ ਤਾਂ ਕੀਰਤਨ ਹੋ ਰਿਹਾ ਸੀ ਸੱਚਖੰਡ ਜੀ ਸਾਧ ਸੰਗ ਜਿਨ ਪਾਇਆ ਤੇਈ ਵਡਭਾਗੇ ਵਿਸਤਰੀ ਹੈ ਤ੍ਰਿਗ ਜੀਵਨਾ ਟੁੱਟੇ ਕੱਚ ਧਾਗੇ ਜਿਹਾ ਇਹ ਪਾਲੀ ਸੋਈ ਬੜ ਭਾਗੇ ਉਹ ਬੜ ਭਾਗੇ ਨੇ। ਬਾਹੇ ਵੀ ਸਾਰੀ ਹੈ ਤ੍ਰਿਗ ਜੀਵਨ ਟੁੱਟੇ ਕੱਚ ਨਾਮ ਨੂੰ ਬਿਸਾਰ ਕੇ ਜਿਉਣਾ ਤ੍ਰਿਗ ਜੀਉਣਾ ਐਸਾ ਜੈਸਾ ਕੱਚੇ ਧਾਗੇ ਦਾ ਤਦ ਟੁੱਟ ਸਕਦਾ ਕੱਚੇ ਧਾਗੇ ਵਾਲ ਜੀਵਨਾਂ ਕਦੇ ਟੁੱਟ ਸਕਦਾ ਟੁੱਟੇ ਕੱਚ ਧਾਗੇ ਤੇ ਕਿਤਾ ਕੇ ਵੀ ਟੁੱਟ ਜਾਂਦਾ ਉਹ ਜੀਵਨ ਨਾਨਕ ਪੁਨੀਤ ਸਾਧ ਲੱਖ ਧੂੜ ਖੁਦੇ ਪੁਨੀਤ ਧੂੜ ਹੈ ਸਾਧ ਹੀ ਧੂੜ ਨਹੀਂ ਹੁੰਦੀ ਸਾਧ ਆਪੇ ਧੂੜ ਹੁੰਦਾ ਮੇਰੇ ਸਾਧ ਧੂੜ ਕਹਿੰਦੇ ਨੇ ਉਹ ਗਲਤ ਕਹਿੰਦੇ ਨੇ ਸਾਧ ਤਾਂ ਧੂੜ ਪੁਨੀਤ ਤੇ ਜੜੂ ਮੇਰੇ ਜਿਹੜੇ ਜਾਣੇ ਪੁਨੀਤ ਧੂੜ ਹੁੰਦੇ ਨੇ ਬਿਤੀ ਜੜੀ ਹੁੰਦੇ ਨੇ ਉਹ ਉਹ ਰੋਸ਼ਨੀ ਹੁੰਦੇ ਨੇ ਰੋਸ਼ਨੀ ਜਿਹੜੀ ਆਕਾਸ਼ ਘੁੱਦੀ ਹੈ ਹਾਂਜੀ ਲੱਖ ਕੋਟ ਪਰਾਗੇ ਲੱਖ ਕੋਟ ਕਰੋੜਾਂ ਕਰੋੜਾਂ ਹੀ ਪਾਰ ਤੈਗੇ ਚਲੇ ਗਏ ਪਾਰ ਪਰਾਗੇ ਪਾਰ ਹੋ ਗਏ ਇਸ ਬਿਤੀ ਨਾਲ ਸਾਡੀ ਦੂਰ ਨਾਲ ਲੱਖਾਂ ਹੀ ਪਾਰ ਹੋ ਗਏ